ਆਜ ਕੋਨੇ ਸਾਰ ਸੰਗਤ ਉਹ ਸਾਰ ਜਵਾਦ ਜਿਹਨ ਸਦੂ ਹੋਰ ਸਾ ਤੋਂ ਆਇਆ ਮੈਂ ਕਿਹਾ ਕੱਤਾ ਜਾਂਦਾ ਮੈਂ بیا ਤੇ ਫੇਰ ਕਿਸੇ ਦਿਨ ਉਹਦੇ ਵਿੱਚ ਜੋ ਸਾਰੇ ਹੀ ਸੋਨਾ ਫੜ ਕੇ ਲੈ ਜਾਂਦੇ ਤੇ ਨਾਲ ਹੀ ਉੱਥੇ ਦੀ ਉੱਥੇ ਰਹਿ ਜਾਂਦੀ ਇਹ ਤੁਹਾਨੂੰ ਕੀ ਕੰਦ ਨਾਲ ਤੁਸੀਂ ਸੋਨਾ ਲੈ ਗਏ ਜਿੱਥੋਂ ਤੁਹਾਨੂੰ ਕੋਈ ਗੁਣ ਮਿਲਦਾ ਗੁਣ ਗ੍ਰਹਿ ਬੰਨ੍ਹ ਕੇ ਆਪ ਕੋਣ ਤੁਸੀਂ ਕਿਉਂ ਅਗਲੇ ਦਾ ਆਪ ਆਪਣੇ ਗੱਲ ਮਾਣਦਾ ਹੋਇਆ ਇੱਥੇ ਤਰ੍ਹਾਂ ਦਾ ਆਪਾ ਬਣਾਓ ਜਦ ਤੱਕ ਤੁਹਾਡਾ ਇਸ ਤਰ੍ਹਾਂ ਦਾ ਆਤਮਾ ਨਹੀਂ ਲੱਭਦਾ ਕਾ ਤੁਹਾ ਪਾਈ ਫਿਰੋ ਸਾੜਿਆ ਰੱਖੀ ਫਿਰੋ ਕਰਫਾਨਾ ਪਾਈ ਫਿਰੋ ਮਾਲਾ ਰੱਖ ਪਾਈ ਫਿਰੋ ਆਹ ਤੁਹਾਡਾ ਸਮਝੋ ਅੱਗੇ ਜਾ ਕੇ ਤੇ ਸਨਕਾਰ ਨਹੀਂ ਹੋਣਾ ਜਦ ਤੱਕ ਤੁਹਾਡਾ ਆਤਮਾ ਦਾ ਨਿਰਮਲ ਹੋ ਜਾਏਗਾ ਬਹੁਤ ਜਿਆਦਾ ਧੰਕਰਾਂ ਦਾ ਤੁਹਾਨੂੰ ਸਮਝੋ ਕਦੇ ਦੇ ਗੁਰੂ ਨੇ ਬਖਸ਼ੇ ਜੀ ਮਨੂ ਕਈਆਂ ਪੁੱਛਿਆ ਇੱਕ ਵਾਰੀ ਠੇਕ ਦੂਰ ਮੈਨੂੰ ਪੁੱਛਿਆ ਵੀ ਇਹ ਭਜਨ ਕਰਨੇ ਆ ਮਨ ਨੱਸਦਾ ਮਨ ਨੰਦੇ ਦਾ ਤੇ ਤੈਨੂੰ ਕੀ ਅਹਵੇਂ ਜੀ ਨੱਖਦਾ ਕਿ ਹੋਵੇ ਅਮੈਂ ਦੋ ਜਨੇ ਲੜਦੇ ਨੇ ਤੇ ਨੱਖਦਾ ਕਿਹੜਾ ਦੋ ਲੜਨ ਤੇ ਨੱਖਦਾ ਤਕੜਾ ਰੱਖਦਾ ਕਿ ਮਾੜਾ ਅਹੇ ਜੀ ਮਾੜਾ ਮਨ ਮਾੜਾ ਹੋਇਆ ਕਿ ਤਕੜਾ ਹੋ ਫਿਰ ਮੈਂ ਕਹਾਂ ਤੈਨੂੰ ਵੀ ਨਹੀਂ ਪਤਾ ਜਦੋਂ ਬਾਂਦਰ ਦੇ ਸਾਹਮਣੇ ਕਿਰਕੀ ਲਾਉਂਦੇ ਨੇ ਬਾਂਦਰ ਦੇ ਸਾਹਮਣੇ ਉਹ ਬਾਂਦਰ ਵੇਂਦਾ ਵੀ ਕਿਰਕੀ ਲਾਉਣ ਗਿਆ ਮੇਰੇ ਵਾਸਤੇ ਆਦਾ ਜੇ ਮੇਰੇ ਵਿੱਚ ਕਾਬੂ ਆ ਗਿਆ ਮੈਨੂੰ ਬਾਰ-ਬਾਰ ਇੱਥੇ ਨਚਾਉਣਾ ਜੀਨਾ ਕਿੰ ਛੜੀ ਦਾ ਕਰ-ਕਰੇ ਉੱਥੇ ਮੇਰੇ ਗਲ ਵਿੱਚ ਰੱਸੀ ਪਾ ਕੇ ਨਚਾਉਣਾ ਉਹ ਫਿਰ ਬੱਜਦਾ ਉਸ ਛੜਕੀ ਤੋਂ ਆਦਾ ਮੈਂ ਦੂਰ ਨੱਪ ਜਾਵਾ ਨੱਪਦਾ ਭੰਦਰ ਉਸ ਛੜਕੀ ਤੋਂ ਦੂਰ ਮੈਂ ਕਹਿੰਦਾ ਮਨ ਨੂੰ ਵੀ ਪਾਦਰ ਨਾ ਜਿਹੜਾ ਉਹ ਜਦੋਂ ਭੱਜੜ ਕਰਦੇ ਹੋ ਨਾ ਮਨ ਨੂੰ ਪਤਾ ਜਦੋਂ ਇਸਨੇ ਮੈਨੂੰ ਭੱਜੜ ਦੀ ਛੜਕੀ ਵਿੱਚ ਲਾ ਲਿਆ ਕਿ ਮੈਨੂੰ ਨਕੁੰਸਕ ਬਣਾ ਦੇ ਰਿਹਾ ਹੈ ਉਸ ਵੇਲੇ ਮਾਰ ਲੱਖਦਾ ਨਾ ਦੀ ਛੜਕੀ ਵਿੱਚ ਫਸਣਾ ਨਹੀਂ ਚਾਹਾਂ ਤੇ ਜਿਹੜਾ ਭੱਜਦਾ ਮਾੜਾ ਜੂ ਭੱਜਦਾ ਤੇ ਉਹਦੇ ਮਗਰ ਲੱਗੋ ਉਹਨੇ ਪਾ ਕੇ ਘੁੱਟੋ ਚੱਲਦੀ ਮਾਰੇ ਉਹ ਜਦੋਂ ਅਸੀਂ ਆਨੇ ਆ ਬੜਾ ਆ ਦੇ ਵਾਸਤੇ ਕੁਝ ਵੀ ਨਹੀਂ ਮਾਨ ਹੋਇਆ ਕਰਦਾ ਉਹਨੂੰ ਪਤਾ ਹੁਣ ਮੈਨੂੰ ਕਿਤੇ ਲੈ ਜਾਓ ਨਾ ਤੁਸੀਂ ਆ ਕਿੱਥੇ ਮੋਟਰ ਵੀ ਚਲੋ ਚਲਾਣੀ ਬਕਾ ਦੱਸ ਦਿਓ ਮੈਨੂੰ ਆਹ ਹੁਣੇ ਉਹ ਕੀ ਨਾਮ ਮੋਟਰ ਚਲਾਉਂਦਾ ਨਾ ਕੱਲ ਨੂੰ ਮੈਂ ਚਲਾਵਾ ਗਾਣਾ ਤੇ ਅਗਲੇ ਪਿੰਡ ਲੈ ਆਈਏ ਆ ਦੇਖੋ ਚਲਾ ਦੇ ਕਿ ਮੈਂ ਤਾਂ ਬਾਹਰ ਨਾਲ ਇੱਥੇ ਹੀ ਸਮਝੋ ਸਵਾਰ ਜਾ ਸਵਾਰ ਜਾ ਕਿ ਹੋਰ ਮੋਟਰ ਥੱਲੇ ਲੈ ਕੇ ਮਾਰ ਖੜਨਾ ਹੈ ਮੇਰੇ ਵਾਸਤੇ ਮੋਟਰ ਚਲਾਉਣੀ ਬੜੀ ਮੁਸ਼ਕਲ ਹੈ ਤੇ ਜਦ ਤੱਕ ਉਹ ਕਿੱਥੇ ਪਹੁੰਚ ਜਾਏਗਾ ਡਿੱਗਦਾ ਚੰਦਾ ਦੇਰ ਘੜ ਉੱਥੇ ਸਹੀ ਲੋਕ ਬੋਲਦੇ ਤੇ ਇੱਕ ਕਹਿੰਦਾ ਕਿੱਥੇ ਨਾਲ ਜੁਟ ਸਹੀ ਕਦੇ ਕਿਸ ਤਰ੍ਹਾਂ ਜੀ ਕੋਈ ਮੰਨ ਦੇਣਾ ਮਨ ਨਾਲ ਝਗੜਾ ਤੇ ਮਨ ਨਾਲ ਸੱਤ ਮਨ ਜਿਹੜਾ ਇਹ ਤਗੜਾ ਕਰਿਆ ਕਰੋ ਲੋਕਾਂ ਨਾਲ ਤਗੜਿਆ ਕਰੋ ਧਾਰਾ ਬਾਛੀਆਂ ਕਿੰਨ ਮੰਦੇ ਨੇ ਨੇ ਤੇਰਾ ਦਾ ਸੌਮੀ ਕਿਉਂ ਆਪਣੇ ਆਪ ਨੂੰ ਗੁਰੂ ਕੋ ਮੰਨੇ ਨੇ ਤੰਦਰਕਾਰ ਤੂੰ ਨਾ ਦਾ ਗੁਰੂ ਮੰਨ ਤੂੰ ਆਪਣੇ ਮਨ ਨਾਲ ਲੜ ਕੇ ਨੂੰ ਕਰਦੇ ਨੇ ਦਰਗਾਹ ਵਿੱਚ ਉਹਨਾਂ ਨੂੰ ਕੁਛ ਤੂੰ ਕਿਉਂ ਉਹਨਾਂ ਦਾ ਗੁਨਾਹਗਾਰ ਬਣਿਆ ਤੂੰ ਆਪਣੇ ਉੱਤੇ ਕਿਉਂ ਮਿੱਦੀਆਂ ਲਾ ਕੇ ਤੂੰ ਆਪਣਾ ਭਾਰ ਉਹਨਾਂ ਦੇ ਚੁੱਕਿਆ ਜਿੱਤ ਲਿਆ ਦਾ ਸਾਰੀ ਕੁਝ ਕਰਦੇ ਨੇ ਤੇ ਕਰ ਮੈਨੂੰ ਆਖਿਆ ਜੀ ਸਾਰੇ ਪਖੰਡ ਮੈਂ ਆਖਿਆ ਪਖੰਡ ਕਰਨ ਵਾਲੇ ਨੂੰ ਹਜ਼ਾਰਾਂ ਮੱਖੇ ਭੇਜ ਦੇ ਤੇ ਤੂੰ ਪਖੰਡ ਕਰ ਖਾ ਤੇ ਮਗਰੇ ਤੇਰੀ ਗਿਆ ਤੇਰਾ ਜਾ ਤੇ ਮੂੰਹ ਪਰ ਜਿਵੇਂ ਮੱਠਾ ਹੋਰ ਕੋਈ ਨਹੀਂ ਫੇੜ ਜਿਹੜੇ ਲੈ ਜਾ ਕੇ ਮੱਠੇ ਦੇਖਦੇ ਨੇ ਇਸ ਬੱਕ ਨੂੰ ਨਾ ਤੋੜਿਆ ਕਰ ਪਾਣੀ ਪੜੋ ਆਪਣੇ ਆਤਮਾਵਾ ਕੋਈ ਇਤਕਾ ਵਾਸਤੇ ਓਏ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਿਆ ਕਰੋ ਈਰਖਾ ਨਾ ਕਰਿਆ ਕਰੋ ਮਾਰੇ ਜਾਓਗੇ ਮੇਰਾ ਬੰਦ ਨਾਲ ਤੇ ਨਹੀਂ ਆਪਣੇ ਆਤਮਾ ਨਾਲ ਕੋਈ ਫਮਜੋ ਹ ਜੰਗਾ ਬੰਨਾ ਲੜੋਗੇ ਤੇ ਫੇਰ ਕਰੋ ਜੇ ਜਿੱਤੋਗੇ ਤੇ ਫੇਰ ਤੁਹਾਡੀ ਤਕਰੀਫਾ ਤੇ ਹੋਊਗੀ ਸੰਗਤ ਵਿੱਚ ਆਖੇ ਅਸੀਂ ਇਸ ਲਈ ਸਾਨੂੰ ਕਿਸ ਤਰ੍ਹਾਂ ਮਨ ਵਕ ਕਰਨਾ ਚਾਹੀਦਾ ਸੰਤਾ ਦੀ ਸੰਗਤ ਜਿਧਰੇ ਵੀ ਕੀਤੀ ਤਰਾ ਦੇ ਗੁਰੂ ਮਹਾਰਾਜ ਦੇ ਦਿੱਤਾ ਕਿ ਸਤ ਸੰਗ ਪਾਵੈ ਜੋ ਨਾਨਕ ਤੇ ਸੋਰ ਨ ਹੋਈ ਹੈ ਤੇਰਾ ਅੰਦਰ ਕੇ ਕੋਈ ਫਿਰ ਧਾਰਨ ਕਰਦੀ ਤੇ ਫਿਰ ਮੈਂ ਕਿ ਤੁਹਾਨੂੰ ਮਿਸਾਲ ਦਿਆਂਗਾ ਹੁਣ ਪ੍ਰਮਾਨ ਦਿੱਤੇ ਨੇ ਇੱਕ ਵਾਰੀ ਫਿਰ ਤੁਹਾਨੂੰ ਯਾਦ ਕਰਾ ਦਿਆਂ ਤਰਨੂ ਜਾ ਕੇ ਸੰਗਤ ਦੇ ਆਇਆ ਵੀ ਭਾਗਾਂ ਵਾਲਿਆ ਕੋਲ ਜਾਇਆਦਾ ਨਾ ਉਹ ਸੰਗਤ ਦੇ ਆਵ ਨਹੀਂ ਸਕ। ਤੇ ਤੁਸੀਂ ਆਪਣੇ ਆਪ ਨੇ ਇੱਥੇ ਆਏ। ਤੁਹਾਨੂੰ ਕਿਸੇ ਈਸ਼ਵਰ ਦੇ ਪ੍ਰੇਰਨਾ ਦਿੱਤੀ ਐ। ਪਿਛੋ ਤੁਹਾਡੇ ਮਨ ਨੂੰ ਵੀ ਚਲੋ ਸਿੱਖਿਆ ਕਰੋ ਨਾ ਤੇ ਚਲੋ। ਤੇ ਜਰਮਿੰਗ ਇੰਨੇ ਤੇ ਬੰਦੇ ਨਹੀਂ ਤੇ ਇਹੀਆਂ ਤੇ ਲਈ ਉਹਨਾਂ ਨੂੰ ਵੀ ਪ੍ਰੇਰਨਾ ਮਿਲੀ। ਉਹਨਾਂ ਦੇ ਨਹੀਂ ਭਾਗ ਹੋਏ। ਤੁਸੀਂ ਆਇਆ ਹੋ ਗੁਰਦੁਆਰੇ ਆਉਂਦੇ ਨੇ ਜਿਨ੍ਹਾਂ ਦੇ ਚੰਗੇ ਭਾਗ ਜਿਹਨਾਂ ਦੇ ਭੜੇ ਭਾਵ ਹੋਣ ਉਹਨਾਂ ਦੀ ਬਾਬਤ ਪਾਇ ਗੁਰਦਾਰਸ ਤੇ ਕਿਹਾ ਇੱਕ ਪਾਸੇ ਮੈਂ ਪੜਾਂਗਾ ਇੱਕ ਪਾਸੇ ਮੇਰੇ ਪੜੋ ਵੀਰ ਨਾ ਖਬਦ। ਪੜੋ ਵੀਰ। ਦੋ ਤੀ ਦੋ। ਪਾਸੇ ਮੈਂ ਪੜਾਂਗਾ ਇੱਕ ਪਾਸੇ ਮੇਰੇ ਵੀਰ ਪੜਨ ਇੱਕ ਪਾਸੇ ਮਾਤਾ-ਬਾਪ ਦੇ ਫੈਨਾ ਪੜਨ। and